ਤੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਚ ਬੈਠਦੇ ਆ ਤੇ ਜਿੱਥੇ ਵੀ ਸੱਚੇ ਪਾਤਸ਼ਾਹ ਜੀ ਦਰਸ਼ਨ ਦਿੰਦੇ ਨੇ ਉੱਥੇ ਇਸੇ ਤਰ੍ਹਾਂ ਦਾ ਵਾਤਾਵਰਣ ਤੇ ਸਤਿਗੁਰੂ ਜੀ ਦੇ ਦਰਸ਼ਨ ਦਾ ਅਸਰ ਹੁੰਦਾ ਚਾਰ ਸ਼ਫੇਰਾ ਇਸੇ ਤਰ੍ਹਾਂ ਦਾ ਬਣ ਜਾਂਦਾ ਜਿਵੇਂ ਇੱਕ ਸੁਗੰਧੀ ਹੋਵੇ ਉਹ ਸਾਨੂੰ ਦਿਖਦੀ ਤੇ ਨਹੀਂ ਪਰ ਉਹ ਥਾਂ ਤੇ ਜਿੰਨੇ ਵੀ ਵਿਅਕਤੀ ਹੁੰਦੇ ਨੇ ਉਹਨੂੰ ਮਹਿਸੂਸ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਵੀ ਦਰਸ਼ਨ ਦਿੰਦੇ ਨੇ ਇਸੇ ਤਰ੍ਹਾਂ ਹੀ ਉਥੋਂ ਦਾ ਮਾਹੌਲ ਹੀ ਨਾਮ ਸਿਮਰਨ ਵਾਲਾ ਕੀਰਤਨ ਵਾਲਾ ਭਜਨ ਬਾਣੀ ਵਾਲਾ ਬਣ ਜਾਂਦਾ ਹੈ ਸੱਚੇ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ ਉਥੇ ਇਸੇ ਤਰ੍ਹਾਂ ਹੀ ਹੁੰਦਾ ਹੈ ਹੁਣ ਤੁਸੀਂ ਪਹਿਲਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੁਣ ਰਹੇ ਸੀ ਨਾਮ ਸਿਮਰਨ ਕਰ ਰਹੇ ਸੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਸੀ ਫਿਰ ਤੁਸੀਂ ਕੀਰਤਨ ਸੁਣਿਆ ਫਿਰ ਜਸੇਦਾਰ ਜੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਸੁਣਿਆ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸ਼ਬਦ ਹੈ ਅੰਤਰਗੁਰ ਅਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਗੁਰ ਵੇਖਣਾ ਸ਼ਰਵਣੀ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹ ਪਾਈਆ ਠਾਓ ਕਹ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗਮਹਿ ਉੱਤਮ ਕਾੜੀ ਹੈ ਵਿਰਲੇ ਕੇਈ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਜਾਂਦੇ ਨੇ ਇਹ ਸ਼ਬਦ ਮੂਰਤੀਮਾਨ ਹੋ ਜਾਂਦਾ ਆਪਣੇ ਸਾਰਿਆਂ ਵਾਸਤੇ ਤੁਸੀਂ ਜ세ਦਾਰ ਜੀ ਤੋਂ ਸਤਿਗੁਰੂ ਦਾ ਜਸ ਸੁਣਿਆ ਪਸੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ ਇਹ ਸਤਿਗੁਰੂ ਬਖਸ਼ਿਸ਼ ਕਰਦਾ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਮਨੁੱਖ ਦੀ ਬੁੱਧੀ ਬਦਲ ਦੇਣੀ ਇਹ ਨਾ ਕਿਸੇ ਤਲਵਾਰ ਨਾਲ ਬਦਲੀ ਜਾ ਸਕਦੀ ਹੈ ਨਾ ਕਿਸੇ ਲਾਲਚ ਨਾਲ ਇਹਦੇ ਸਤਗੁਰੂ ਸਚੇਪਾ ਸਾਹਿਬ ਦੀ ਇੱਕ ਅਲੌਕਿਕ ਸ਼ਕਤੀ ਹੈ ਕਿ ਉਹ ਸਿੱਖ ਤੇ ਬਖਸ਼ਿਸ਼ ਕਰਨ ਜਿਸ ਦੇ ਉੱਤਮ ਭਾਗ ਹੋਣ ਤੇ ਉਸ ਦੀ ਬੁੱਧੀ ਬਦਲ ਦੇਣ ਜਦੋਂ ਸਤਗੁਰੂ ਰਾਮ ਸਿੰਘ ਸਚੇਪਾ ਸਾਹਿਬ ਜੀ ਨੇ ਕਿਰਪਾ ਕੀਤੀ ਸੀ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਖਸ਼ ਤੇ ਸੱਜਣ ਠੱਗ ਵਰਗਿਆਂ ਨੂੰ ਦੇਵਲੂਤ ਵਰਗਿਆਂ ਰਾਖਸ਼ਾਂ ਨੂੰ ਦੇਵਤਿਆਂ ਵਾਲਾ ਜੀਵਨ ਬਖਸ਼ਿਆ ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਬਾਸਾ ਜਿਨ ਜਦੋਂ ਕਿਰਪਾ ਕੀਤੀ ਤੇ ਜਿਹੜੇ ਸ਼ਹੀਦ ਸਿੱਖ ਹੋਏ ਨੇ ਮਲੇਰਕੋਟਲੇ ਜਿਨ੍ਹਾਂ ਨੂੰ ਮੌਤ ਦਾ ਡਰ ਇੱਕ ਤਿਨਖੇ ਵਰਗਾ ਵੀ ਨਾ ਲੱਗਿਆ ਜਿਨ੍ਹਾਂ ਨੇ ਇੱਕ ਸਰੀਰ ਨੂੰ ਤਿੰਖੇ ਵਾਂਗੂ ਸਮਝਿਆ ਉਹਨਾਂ ਨੂੰ ਮੌਤ ਦਾ ਬਿਲਕੁਲ ਵੀ ਡਰ ਨਾ ਲੱਗਿਆ ਉਹ ਉਹ ਸੱਜਣ ਸਨ ਜਿਨ੍ਹਾਂ ਦਾ ਪਹਿਲਾ ਜੀਵਨ ਕੋਈ ਮਹਾਪੁਰਸ਼ਾਂ ਵਾਲਾ ਜੀਵਨ ਨਹੀਂ ਸੀ ਉਹ ਜਦੋਂ ਸਤਿਗੁਰੂ ਰਾਮ ਸਿੰਘ ਜੀ ਦੇ ਚਰਨ ਸਰਨ ਆਏ ਉਸ ਤੋਂ ਪਹਿਲਾਂ ਸ਼ਿਕਾਰ ਖੇਡਦੇ ਸੀ ਮਾਸ ਖਾਂਦੇ ਸੀ ਉਸੇ ਤਰ੍ਹਾਂ ਹੀ ਲੋਭੀ ਸਵਾਰਥੀ ਸਨ ਤੇ ਸਾਰੇ ਹੀ ਐਬਾਂ ਵਿੱਚ ਫਸੇ ਹੋਏ ਸਨ ਮਹਾਰਾਜਾ ਪਟਿਆਲਾ ਦੇ ਹਾਜ਼ਰ ਬਾਦਸ਼ਾਹਾਂ ਵਿੱਚੋਂ ਸਨ ਸਰਦਾਰ ਹੀਰਾ ਸਿੰਘ ਜੀ ਸਰਦਾਰ ਲੈਣਾ ਸਿੰਘ ਜੀ ਪਰ ਜਦੋਂ ਸਤਿਗੁਰੂ ਰਾਮ ਸਿੰਘ ਦੀ ਸਰਨ ਵਿੱਚ ਆ ਗਏ ਤੇ ਉਹਨਾਂ ਨੂੰ ਇਹ ਪ੍ਰਾਪਤੀ ਹੋਈ ਉਹਨਾਂ ਦਾ ਇਹ ਮੋਹ ਦਾ ਬੰਧਨ ਜਿਹੜਾ ਜੜ ਤੇ ਚੇਤਨ ਮਾਇਆ ਦਾ ਬੰਧਨ ਜਿਹੜਾ ਇਸ ਬੰਧਨ ਦੇ ਵਿੱਚ ਫਸ ਕੇ ਹੀ ਅਸੀਂ ਦੁਖੀ ਹੁੰਨੇ ਆ ਤੇ ਸਤਿਗੁਰੂ ਦੀ ਚਰਨ ਸਰਨ ਵਿੱਚ ਆ ਕੇ ਇਹ ਬੰਧਨ ਤੋਂ ਹੀ ਛੁੱਟਣਾ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਇੱਕ ਪ੍ਰਾਪਤੀ ਆ ਗੁਰ ਲੱਗਾ ਤਬ ਜਾਣੀਆ ਮਿਟੇ ਮੋਹ ਤਨਤਾਪ ਹਰਖ ਸੋਗ ਦਾ ਜਾਏ ਨਹੀਂ ਤਬ ਹਰ ਆਪੇ ਆਪ ਸਤਿਗੁਰੂ ਮਿਲਿਆ ਉਦੋਂ ਸਮਝੋ ਕਿ ਅਸੀਂ ਹੁਣ ਸਤਿਗੁਰੂ ਵਾਲੇ ਹੋ ਗਏ ਆ ਜਦੋਂ ਸਤਿਗੁਰੂ ਬਖਸ਼ਿਸ਼ ਕਰੇ ਤੇ ਇਹ ਮੋਹ ਦਾ ਤਾਪ ਮਿਟ ਜਾਵੇ ਇਸ ਸਰੀਰ ਦਾ ਵੀ ਮੋਹ ਸਭ ਤੋਂ ਵੱਡਾ ਮੋਹ ਇਸ ਸਰੀਰ ਦਾ ਹੀ ਮੋਹ ਹੈ। ਸਾਧ ਜੀ ਬਾਕੀ ਸੱਜਣ ਇੱਥੇ ਇਸੇ ਤਰ੍ਹਾਂ ਹੀ ਬਿਠੇ ਰਹਿਣ ਸੱਚੇ ਪਾਤਸ਼ਾਹ ਜੀ ਫੇਰ ਦਰਸ਼ਨ ਦੇਣਗੇ ਹੁਣੇ। ਜਦੋਂ ਸਤਿਗੁਰੂ ਰਾਮ ਸਿੰਘ ਜੀ ਨੇ ਬਖਸ਼ਿਸ਼ ਕੀਤੀ ਤੇ ਉਹਨਾਂ ਸਿੱਖਾਂ ਦੇ ਸਰੀਰ ਦਾ ਵੀ ਮੋਹ ਮਿਟ ਗਿਆ। ਤੁਸੀਂ ਸਮਝਦੇ ਹੋ ਕਿ ਜਦੋਂ ਪਾਕਿਸਤਾਨ ਬਣਿਆ ਉਦੋਂ ਮਾਵਾਂ ਆਪਣੇ ਬੱਚਿਆਂ ਨੂੰ ਛੱਡ ਕੇ ਵੀ ਭੱਜੀਆਂ ਕਿਉਂ ਆਪਣੇ ਸਰੀਰ ਵਾਸਤੇ? ਬਾਂਦਰੀ ਵਾਸੇ ਕਹਿੰਦੇ ਨੇ ਕਿ ਉਹ ਮਰੇ ਹੋਏ ਬੱਚੇ ਨੂੰ ਵੀ ਚੁੱਕੀ ਫਿਰਦੀ ਆ ਪਰ ਜਦੋਂ ਗਰਮੀ ਦੇ ਨਾਲ ਉਹਨੂੰ ਆਪਣੀ ਮੌਤ ਸਾਹਮਣੇ ਦਿਸਦੀ ਸੀ ਥੱਲੋਂ ਉਹਦੇ ਪੈਰ ਛੱਡਦੇ ਸੀ ਤੇ ਉਹ ਆਪਣੇ ਬੱਚੇ ਨੂੰ ਰੱਖ ਕੇ ਉੱਤੇ ਬੈਠ ਗਈ ਕਿਸ ਵਾਸਤੇ ਆਪਣੇ ਸਰੀਰ ਵਾਸਤੇ ਤੇ ਸਭ ਤੋਂ ਵੱਡਾ ਮੋਹ ਜਿਹੜਾ ਮਨੁੱਖ ਦਾ ਆਪਣੇ ਸਰੀਰ ਦਾ ਮੋਹ ਹੀ ਆ ਇਸ ਵਾਸਤੇ ਹੀ ਆਦਮੀ ਭੱਜਦਾ ਹੈ ਇਸ ਵਾਸਤੇ ਹੀ ਜਦੋਂ ਮੌਤ ਆਉਂਦੀ ਹੈ ਇਸ ਤੋਂ ਤਰੰਦਾ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੇ ਸਰੀਰ ਨੂੰ ਬਚਾ ਲਵਾਂ ਤੇ ਸਤਿਗੁਰੂ ਦੀ ਚਰਨ ਸਰਨ ਵਿੱਚ ਆ ਕੇ ਸਤਿਗੁਰੂ ਤੋਂ ਇਹ ਬਖਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ ਕਿ ਇਹ ਸਰੀਰ ਦਾ ਵੀ ਮੋਹ ਮਿਟ ਜਾਂਦਾ ਹੈ ਤੇ ਜਦੋਂ ਇਹ ਸਰੀਰ ਦਾ ਮੋਹ ਨਹੀਂ ਮਿਟਦਾ ਤੇ ਅਖੀਰ ਵੇਲੇ ਸਾਨੂੰ ਇਹ ਸਰੀਰ ਆਪਣਾ ਛੱਡਣਾ ਪੈਂਦਾ ਤੇ ਇਹ ਜਿਹੜਾ ਜੀਵ ਆਤਮਾ ਇਹ ਫਿਰ ਦੁਖੀ ਹੁੰਦਾ ਕਿ ਇਹ ਤੇ ਸਰੀਰ ਮੇਰਾ ਸੀ ਜਿਸ ਨੂੰ ساری ਉਮਰ ਆਪਣਾ ਸਮਝਦਾ ਰਿਹਾ ਹਾਂ ਫਿਰ ਇਹਦੇ ਨਾਲੋਂ ਉਸ ਜੀਵ